ਦੋਹਰਾ ਚੰਦਰਪੁਰੀ ਭੀਤਰ ਹੂ ਤੋ ਸੈਨ ਇਕ ਰਾਵ ਬਲਗੁਣ ਬੀਰ ਮੈ ਜਨਕ ਤ੍ਰਿਦੇ ਸਵੇਸਰ ਕੇ ਭਾਵ ਭਾਗਵਤੀ ਤਾ ਕੀ ਤ੍ਰਿਆ ਜਾ ਕੋ ਰੂਪ ਅਪਾਰ ਰਾਤਿ ਰਾਤਿ 나ਥ ਪਛਾਨ ਤੇ ਝੁਕ ਝੁਕ ਰਹੇ ਜੋਹਾਰ ਏਕ ਪੁਰਖ ਸੁੰਦਰ ਹੂ ਰਾਣੀ ਲੈਉ ਬੁਲਾਏ ਭੋਗ ਅਦਿਕਤਾ ਸੋ ਕੀਓ ਹਿਰਦੈ ਹਰਖੋ ਵਜਾਏ ਚੌਬੀ ਖੇਲ ਕਰਤ ਰਾਜਾ ਜਿਉ ਆਇਓ ਰਾਣੀ ਹਿਰਦੈ ਅਦਿਕ ਦੁਖ ਪਾਇਓ ਯਾ ਕੋ ਦਈਆ ਕਹੋ ਕਾ ਕਰਿ ਹੋ ਕੇ ਤਬੈ ਜਾਰ ਜੋ ਕਥਾ ਉਚਾਰੀ ਰਾਣੀ ਕਰਹੋ ਨ ਹਮਾਰੀ ਯਹ ਤਰਬੂਜ ਕਾਟ ਮੁਏ ਦੀਜੈ ਯਾ ਕੀ ਗਰੀ ਭੱਜ ਕਰ ਰਾਣੀ ਸੋ ਕਾਜ ਕਮਾਇਓ ਕਾਟ ਹੈ ਤਰਬੂਜ ਖੁਲਾਇਓ ਲੈ ਖੋਪਰ ਤਨ ਸਿਰ ਪੈ ਤਰਿਓ ਸਵਾਸ ਲੇਤ ਕਾ ਛੇਕੋ ਕਰਿਓ ਧੋਰਾ ਧਰ ਖੋਪਰ ਸਿਰ ਪਰ ਨਦੀ ਤਰਿਓ ਨਿਰਪਦ ਦਰਸ ਹੋਏ बिन लोगन देखत गयो भेद ना जानत ਕੋਇ तब रानी ऐसे कहो सुनिए बछरसाल बहुत जात तरबूज जो मोहे मिला दरहाल वचन सुनत राजा तव पठे मनुखा अनेक जात बहे तरबूज को पहुचत भयो न एक जव बे तब रानी जो वचन उचारए सुनो नाथ बड भाग हमारे भूड़ को जाके तुमरे मोर मुंड आप जस बहुत धरै जोरा rani het hedwan ke manukh burayo ek yah ap jas na kabo mitaye bhak hai log anek chaupai ap hed hai tribhuij drayo aphe aaye mere pair swayo aphe hor manushn leena triyatra trna ken hu ji nam eth sri charitra pgyane triyatra chitre bhup mantri samvade 77 vo ਦੋਰਾ ਇਕਤ ਖਾਨੁ ਜੈਰਮੈ ਬਿਵਚਾਰਿਨ ਤਿਹਨਾਰੇ ਤਾ ਸੋ ਕਰਿਉ ਚਰਿਤ੍ਰ ਤਿਨ ਸੋ ਤੋਹਿ ਕਉ ਸੁਧਾਰਿ ਚਉਪੀ ਸਮਤ ਬਾਢਿਐ ਤਵੈ ਉਚਾਰੋ ਸੁਣ ਗੀਗੋ ਤੈ ਬਚਨ ਮਾਰੋ ਹਉ ਅਬਿਹੀ ਪਰਦੇਸ ਸਿਧੈ ਹਉ ਖਾਟ ਕਮਾਇ ਤਵੈ ਧਨ ਲਿਐ ਹਉ ਜੋ ਕਹਿ ਕੈ ਪਰਦੇਸ ਸਿਧਾਰੋ ਖਾਟ ਤਰੇ ਛਪ ਰਿਓ ਵਿਚਾਰੋ ਤਬ ਬਾਢਿਨੇ ਇਕਜਾਰ ਬੁਰਾ ਆਇਓ ਕਾਮ ਖੇਲ ਤੇ ਸਾਥ ਕਮਾਇਓ ਕਾਮ ਕੇ ਤਾਸੋ ਤ੍ਰੀ ਮਾਨਿਓ ਖਾਟ ਤਰੇ ਨਿਜ ਪਥੈ ਪਛਾਨਿਓ ਸਭ ਅੰਗਨ ਬੇਹ ਬਲ ਵੈ ਗਈ ਚਿਤ ਗੈ ਬਿਖੈ ਦੁਖ ਤਿਆਤ ਭਈ ਤਬ ਤਾਸੋ ਤ੍ਰੀ ਬਚਨ ਉਚਾਰੇ ਮੋਹ ਕਰਤ ਦਈ ਕੇ ਬਸ ਬਾਹ ਕੇ ਛਾਈ ਦੋਰਾ ਨਿਤ ਅੰਸੂਆਂ ਆਖਿਨ ਭਰੋਂ ਰਹੋ ਮਲੀਨੇ ਭੇਸ ਪੌਰ ਲਗੇ ਬਹਿਰੋ ਨਹੀਂ ਪ੍ਰਾਨਨਾਥ ਪਰਦੇਸ ਲਗਦ ਵੀਰ ਯਾ ਬਾਣਸੀ ਬਿਕਸੋ ਲਗਤ ਅਨਾਜ ਪ੍ਰਾਨਨਾਥ ਪਰਦੇਸ ਗੇਤਾ ਬਿਨ ਕਛੂ ਨਾ ਸਾਜ ਬਾੜੀ ਐਸੇ ਬਚਨ ਸੁਨ ਮਰਮੈ ਜਾਰ ਸਹਿ ਤਰੀ ਖਾਟ ਲੈ ਨਾ ਚੁੱਠਿਓ ਤਤਕਾਲ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਭੂਮੰਤਰੀ ਸੰਵਾਦੇ 78ਵਾਂ ਚਿਤਰ ਸਮਾਪਤ ਮਸਤ ਸੁਖ ਮਰਸ ਦੋਹਰਾ बन के एक बनारसी विष्णु दत्त तेहे नाम विस्मतीता के ਕੇ धन जाके बहु धाम चौपी बनियो हेर बनज के गयो मैं दुह त्रिको अद दयो तेहे त्रिय पै ते रहयो न जाई केर गियो एक पुरख बुलाई केर कुमार गर्भ रह गयो कीने जतन दूर न भयो नव मास पछे सुत जायो तमने दिवस बनक घर आयो वनक कोब कर वचन सुनायो का क्षत्रिय तै बिबचार कमायो भू करे बिन पूत ना होई बाल वृद्ध जानत सब कोई सुनो शाहो मैं कथा सुनाऊ तुमरे चित्त को भ्रम मिटाऊ एक योगी तुमरे गृह आयो ते प्रसाद ते गृह सुत पायो दोहरा मृर्जनाथ योगी उत सो आयो ए ताम दृष्टपोह मो सो कियो सुत दीनो गृह राम ਬਨਕ ਬਜਨ ਸੁਣ ਚਉਪ ਰਿਓ ਮਨ ਮੈ ਭਉ ਪ੍ਰਸੰਨ ਦ੍ਰਿਸ਼ਟ ਭੋਗ ਜਿਨ ਸੁਧ ਦਿਓ ਧਰਨੀ ਤਲ ਸੋ ਥਨੈ ਇਤਿ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਬਾਦੇ 79 ਮੋ ਸਮਾਪਤ ਮਸਤ ਸੁਭ ਮਸਤੇ ਅਪਜੂ ਦੋਹਰਾ ਬਿੰਦਰਾ ਬਨ ਗ੍ਰਹ ਅਨੰਤ ਕੇ ਕਾਂ ਲਿਓ ਅਵਤਾਰ ਤੀਨ ਲੋਗ ਜਾ ਕੋ ਸਦਾ ਨਿਤ ਉਠਕਰਤ ਜੁਹਾਰ ਚੌਪੀ ਸਭ ਗੋਪੀਤਾ ਕੇ ਗੁਣ ਗਾਵਹਿ ਨਿਤਿਆ ਕਿਸ਼ਨ ਕਾ ਸੀ ਝੁਕਾਵਹਿ ਮਨ ਬਸਿਓ ਪ੍ਰੇਮ ਆਤੀ ਪਾਰੀ ਤਨ ਮਨ ਦੇਤ ਆਪਨੂੰ ਵਾਰੀ ਰਾਧਾ ਨਾਮ ਗੋਪੀ ਇਕ ਰਹਿ ਕ੍ਰਿਸ਼ਨ ਕ੍ਰਿਸ਼ਨ ਮੁਖਤੇ ਨਿਤ ਕਹਿ ਜਗ ਨਾਇਕ ਸਭ ਪ੍ਰੇਮ ਲਗਾਇਓ ਸੂਤ ਸਿਧਨ ਕੀ ਭਾਂਤ ਵਢਾਇਓ ਦੋਹਰਾ ਕ੍ਰਿਸ਼ਨ ਕ੍ਰਿਸ਼ਨ ਮੁਖ ਤੇ ਕਹਿ ਛੋਰ ਧਾਮ ਕੋ ਕਾਮ ਨਿਸ ਦਿਨ ਰਟਤ ਬਿਹੰਗ ਜਿਉ ਜਗ ਨਾਇਕ ਕੋ ਨਾਮ ਚਉਪਈ ਤਰਾਸ ਨਾ ਪਿਤ ਮਾਤਾ ਕੋ ਕ੍ਰਿਸ਼ਨ ਮੁਖ ਤੇ ਉਚਰੈ ਹੀਰਣ ਤਾਹੇ ਨਿਤ ਉਠਿਆਵੈ ਨੰਦ ਜਸੋ ਮਤ ਦੇਖ ਲਜਾਵੈ ਸਵਈਆ ਜੋਵਨ ਦੇਵ ਜਗੇ ਅਤਿ ਸੁੰਦਰ ਜਾਤਿ ਰਾਜ ਜੁਰੀ ਕਾ ਨਾਤਾ ਬ੍ਰਿਜ ਲੋਕ ਸਵੇ ਹਰੀ ਰਾਏ ਕਹੀ ਇੱਕ ਬਾਤਾ ਹਾਥ ਉਚਾਏ ਹਣੀ ਛਤियां ਮੁਸਕਾਏ ਲਜਾਏ ਸਖੀ ਚਹੁ ਘਾਤੈ ਨੈਣਨ ਸੋ ਕਹਿਓ ਏ ਜਦ ਰਾਤ ਸੋ ਪਹੁਨ ਸੋ ਕਹਿਓ ਜਾਹੋ ਇਹਾ ਤੈ ਦੋਹਰਾ ਨੈਣਨ ਸੋ ਹਰਿ ਰਾਏ ਕਹਿ ਭਉਨ ਉਤਰਦੀਨ ਭੇਦ ਨ ਪਾਇਓ ਕਉਨੂ ਕ੍ਰਿਸ਼ਨ ਵਿਦਾ ਕਰਦੀਨ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਬਾਦੇ ਅਸੀਮੋ ਚਿਤ੍ਰ ਚਰ ਸਮਾਪਤ ਮਸਤ ਸੁਭ ਮਸਤੇ ਅਬਜੂ